ਜੇ ਪ੍ਰਸਾਦ ਕਰੇ ਪੁੰਨ ਬੋਧਾਨ ਹਰ ਆਦ ਪੈਰ ਕਰ ਤਿਸ ਦਾ ਧਿਆਨ ਸਰਉ ਦੇ ਵਿੱਚ ਪੁੰਨ ਦਾਨ ਚੰਗਾ ਬੰਨਿਆ ਹੈ ਠੀਕ ਹੈ ਇਹ ਨਹੀਂ ਕਹਿੰਦਾ ਆਖਦਾ ਪਰ ਜੇ ਦੀ ਕਿਰਪਾ ਨਾਲ ਕਰਨਾ ਤੇ ਸੁਭਰਤਾ ਦਈਏ ਕਰਦੀ ਇੱਕ ਗਰੀਬ ਦੇ ਰੋਟੀ ਦੀ ਵਗਦੀ ਤੇ ਤਾਂ ਕਰਦਾ ਕਾਹੀ ਕਰਦਾ ਉਹ ਨਾ ਕੋ ਬੰਦਾ ਮੈਂ ਕਰਦਾ ਤੂ ਉਹਦਾ ਧੰਨਵਾਦ ਕਰ ਜਿਹੜਾ ਤੈਨੂੰ ਕਰਾਉਂਦਾ ਮਨ ਆਸਪੈਰ ਕਰ ਤੇ ਸਾਰੇ ਉਹਦੀ ਕਿਰਪਾ ਜੇ ਉਹਦੀ ਮਨ ਰਾਪਨ ਕਰਨ ਵਾਲੇ ਦਾ ਧੰਨਵਾਦ ਕਰਾਂਗਾ ਪੁੰਨਦਾਨ ਕੀਤੇਗਾ ਹੰਕਾਰ ਤੋਂ ਬਚ ਰਹਿਣਾ ਤੁਸੀਂ ਗੱਲ ਲਈ ਵੀ ਇਹ ਇਹ ਸਿੱਖਿਆ ਹੈ ਕਿ ਸੰਧੀ ਜੇ ਪੁੰਨਦਾਨ ਤੇ ਹੰਕਾਰ ਤੋਂ ਬਚਣਾ ਰੀਐਕਸ਼ਨ ਤੋਂ ਬਚਣਾ ਬਨਾਰਟ ਬਾਹਰ ਕਰ ਤਸਤਾਂ ਬਨਾਰਟ ਬਾਹਰ ਕਰ ਤਸਤਾਂ ਜੇ ਤਾਂ ਮੈਗੀ ਦਾ ਦਾਨ ਫੇਟਾ ਗਿਆ ਫਸੇ ਜਨਮ ਹੋਊਗਾ ਅਗਲਾ ਤਾਂ ਮਿਲੂਗੀ ਜੇ ਤਾਂ ਕੀਤਾ ਅਗਲਾ ਨਾ ਅਗਲਾ ਜਨਮ ਬੀਜ ਦੇ ਫੇਰ ਤਾਂ ਮਿਲੂਗੀ ਸਜਾਅ ਵਾਲਾ ਜਨਮ ਲੂਗਾ ਜੇ ਕਹੇ ਵੀ ਮੈਨੂੰ ਤਾਂ ਕਰਵਾਤਾ ਬੇਤੋ ਦੇਣਾ ਦਾਤਾ ਹੈ ਹੇ ਨੂੰ ਵੇਰੇ ਥੂ ਦੋ ਕੇ ਮੈਂ ਤੁਝਾ ਸੋ। ਤਾਂ ਕੰਮ ਕਰਾਂ ਤੇ ਤੋਂ ਜਾਸ ਜਾਸ ਹੈ ਤੇ ਦੁਆਤਾ ਹੈ ਜਾਸ ਦੁਆਤਾ ਜਾਸ ਨਾਬ ਚੜਾ ਭਵ ਨ ਸਰਦਾਰ ਜੀ। ਇਹ ਨੂੰ ਜਾਸ ਨਾਬ ਚੜ੍ਹਦਾ ਕਹਿੰਦੇ ਐ ਆਪ ਕਹੇ ਵੀ ਜਾਸ ਤਾਂ ਮੈਨੂੰ ਦੁਆਇਆ ਪਰ ਦਿੱਤਾ ਕਹਿਉਂ ਆਇਤਾ ਤੇਰਾ ਵਿਚ ਜਿੰਨਾ ਕਰ ਮੈਂ ਉਹ ਕੀ ਪਿਆ ਚੌਕੀਦਾਰੀ ਦੇਣ ਦੀ ਲੇਬਰ ਫਰਾਉਂਡ ਦੀ ਲੇਬਰ ਕੀਤੀ ਹੈ ਕਿ ਆ ਪਹਿਲਾਂ ਸਾਹਮਣੇ ਦੀ ਲੇਬਰ ਕੀਤੀ ਹੈ ਬੈਂਕ ਵਾਲੇ ਵੀ ਲੈਣੇ ਥੋੜਾ ਬਹੁਤਾ ਤਾਂ ਆਪਣਾ ਜੀ ਚੀਜ਼ਾਂ ਖਾਂਦੇ ਨੇ ਗੋਡਾਊਨ ਵਾਲੇ ਕਰਾਇਆ ਵੀ ਲੈਦੇ ਨੇ ਮੈਨੂੰ ਤਾਂ ਉਹ ਤਾਂ ਜਾਉਂਦੇ ਤਾਂ ਕੋਈ ਜਾਂਸਨ ਕਰਦਾ ਇਸ ਨਾਲ ਦਾ ਅੰਤ ਤੋਂ ਆ ਜੇ ਕਹ ਮੈਂ ਦੱਸਦਾ ਫੇਰ ਦਬੋ ਦਿੰਦਾ ਉਹ ਹੀ ਤਾਂ ਕਰਤਾ ਹੁੰਦਾ ਕਿ ਮੈਂ ਜੇ ਕਹ ਮੈਂ ਦੱਸਦਾ ਕਾਹਦਾ ਕਿ ਮੈਂ ਜੇ ਧਿਆਨ ਉਹਦਾ ਕਰੇ ਜਿਹਨੂੰ ਦੋਇਆ ਮਾਲ ਦਾ ਜੇ ਤਾਂ ਮਾਲ ਕੋਈ ਹੋਰ ਸਭਰਾਂ ਨੂੰ ਰਿਜਕ ਪਹੁੰਚਾਉਣ ਵਾਲਾ ਉਹ ਹੈ ਸਾਨੂੰ ਰਿਜਕ ਦੇਣ ਵਾਲਾ ਵੀ ਉਹ ਹੈ ਤਾਨੂੰ ਰੋਜਕ ਤਾਂ ਦਾ ਅਸੀਂ ਕੋਈ ਡਿਊਟੀ ਕਰਦੇ ਹਾਂ ਉਹ ਦੀ ਉਹ ਡਿਊਟੀ ਸੀ ਅਸੀਂ ਬਚਾਤਾ ਤੇ ਇਹ ਤੋਂ ਕੋਈ ਡਿਊਟੀ ਲੈਂਦਾ ਤੇ ਉਹ ਲੈਤਾ ਜੇ ਇਹ ਸੈਂਕਲ ਤੋਂ ਸਾਰੇ ਬਚਾ ਦਿੰਦਾ ਚਲਦਾ ਕੋਈ ਹੁੰਦੀ ਹੈ ਕਿਤੇ ਵੀ ਸੀਟ ਤੇ ਬੈਠਾ ਹੋਵੇ ਚਾਹੇ ਗਰੀਬ ਹੈ ਜਾਂ ਅਮੀਰ ਸੀਟ ਕੋਈ ਹੋਵੇ ਡਿਊਟੀ ਹੈ ਇੱਕ ਬੁਝੂਰ ਦੇ ਵੀ ਡਿਊਟੀ ਹੈ ਫਟੀ ਦੇ ਵਿੱਚ ਚੌਕੀਦਾਰ ਦੀ ਵੀ ਡਿਊਟੀ ਹੈ ਜਿਹੜਾ ਭਾਈ ਉੱਥੇ بڑا ਅਫਸਰ ਅਸਾਂ ਨਹੀਂ ਉਹ ਆਪਣੀ ਕੰਮ ਦੀ ਗੱਲ ਹੈ ਲੈ ਅਗੱਟੇ ਇਹ ਹਾਵਨਾ ਤਰ੍ਹਾਂ ਗੌਰਮ ਮਿਲ ਲਈ ਚੌਕੀਦਾਰ ਦਾ ਕਾਰ ਬਿਲਕੁਲ ਨਹੀਂ ਸਾਥ ਆਉਂਦਾ ਫ੍ਰੀਜਰ ਉੱਤੇ ਮਿਲਦੀ ਫਟੀ ਵੱਡੂ ਫਰਕ ਆ ਵੀ ਉਹ ਉਹਦੀ ਡਿਊਟੀ ਵੱਡੀ ਹੈ ਉਹਦੇ ਕੋ ਅਕਲ ਵੀ ਵੱਡੀ ਹੈ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੈ ਫਟੀ ਕੋਲ ਲਾਭ ਵੀ ਜ਼ਿਆਦਾ ये जग ये थे ये तोरा ये औरा सी काvarphi ऐसे से पेटी होडी है हां जी जय प्रसाद तुन आचार व्यवहारि सिद्ध प्रभु को साथ साथ चितारी हां जित स्वीकार फादर आन प्रसाद तुन आचार व्यवहारि हां बिहार तेरा आधार बहुत बढ़िया तेरे पीछे भी की कृपा है ਕੋ ਅੰਦਰ ਆਦਮਾ ਅੰਦਰ ਆਦਮਾ ਤੇ ਫਾਲੀ ਬੈਠਾ ਤੇ ਬੈਠਾ ਜੇ ਬੋਲਨੇ ਕੁਝ ਹੋ ਜੇ ਬੇਇਮਾਨੀ ਕਰਦੀ ਕੋਈ ਨਹੀਂ ਬੋਲਣਾ ਕੋਈ ਰਹਿਤ ਵੀ ਕਰਦੀ ਯਾਦ ਹੀ ਕਰਨਾ ਉਹਦੇ ਕਰਕੇ ਗਰੰਟੀ ਠੀਕ ਹੈ ਜਿਵੇਂ ਬਿਹਾਰ ਦਰਹਾਂ ਹਾਂ ਉਹਦੇ ਕਰਕੇ ਵਿਆਹ ਠੀਕ ਹੈ ਉਹ ਜਦੋਂ ਅਫਸਰ ਸੱਲੇ ਤੋਂ ਤਾਂ ਸੇ ਜਾਂਦੀ ਹੈ ਰਾਜਾ ਹੋ ਜਾਆ ਤੋ ਲਾ ਹਾਰ ਗਿਆ ਵੀ ਮਰ ਗਿਆ ਬਿਹਾਰ ਗਿਆ ਵੀ ਮਰ ਗਿਆ ਹਾਂ ਯਾ ਹਾਰੂ ਖਤਮ ਆ ਫਿਰ ਆ ਹਾਰੂ ਗਿਆ ਹਾਂ ਆ ਹਾਰੂ ਗਈ ਭਰਾਗ ਚਲਾ ਗਿਆਨ ਕੋ ਘਟ ਗਿਆ ਮਰ ਗਿਆ ਬਿਹਾਰੂ ਗਿਆ ਬਿਹਾਰ ਉਲਟਾ ਹੋ ਗਿਆ ਯਾਰ ਇਹ ਉਲਟਾ ਕੁ ਜੀਨੀ ਭਵਾਂ ਤੇ ਜਗਾ ਤੇ ਲੱਗਾ ਹੈ ਕਿ ਦਰਦੀ ਚੀਜੋ ਪਰ ਮਾਈ ਸਾਡੇ ਰੁਹਾਈਆਗਾ ਤਾਂ ਮੈਂ ਤਾਂ ਤਨ ਨੂੰ ਮੈਂ ਕੀਤਾ ਵਿਆਹ ਰੁਕਿਆ ਹੋ ਗਿਆ ਬਸ ਆਕਾ ਦੇ ਪੋਛਣੇ ਸੱਜਣਾਂ ਦੋਲੇ ਤੇ ਉਹ ਵੀ ਗਿਆ ਯਾਰ ਪਰ ਕੋ ਆਪਣੀ ਕਹਾ ਉਹ ਉਹ ਨਹੀਂ ਭਾਵ ਹੈ ਆਪਣਾ ਤੋਂ ਫਿਰ ਜੋ ਆਪਣਾ ਯਾਦ ਕਰਨਾ ਮਾਇਕ ਜੀ ਤਾ ਮਾ ਦਾਨੂ ਉਹ ਯੋਗ ਨਾਲ ਸਾਥ ਕਰਨਾ ਵਾਲਾ ਨੇ ਪਰ ਜੋ ਆਪਣੇ ਨੇ ਉਹ ਗੱਲ ਵੀ ਇਥੇ ਲੱਭੀ ਗਈ ਹੈ ਪਹਿਲੀ ਹੈਗਾ ਸਿੱਖ ਉਹ ਅਰਦਾਸ ਕਰਾਉਂਦਾ ਗੁਰਦੁਆਰੇ ਦਲਨਾਲਾ ਕਰਦਾ ਆਹ ਤੇ ਖਿਲਾਫ ਕੋ ਜਾਨ ਨਾਲ ਦੇ ਗਏ ਨਾ ਦੇਖ ਲੈ ਕੀ ਕਰਦੇ ਨੇ ਲੋਕ ਬੰਦੇ ਇਹ ਕੀ ਗੱਵੜਨਾ ਰਹਾ ਹੈ ਰੋਕਾਂ ਦੋ ਹਾਂ ਉਹ ਦਿੰਦੇ ਨੇ ਜਾਨ ਕੋਈ ਕਰਾਂ ਇਹਨਾਂ ਦਾ ਇਲਾਜ ਆਪਣਾ ਇਹ ਗੱਲ ਜਿਆਦਾ 78 ਚ ਹੋਇਆ ਤਕੈਕ ਤੋ ਕਹਿੰਦੇ ਆਪ ਨੂੰ ਹੀ ਪਾਵੈ ਨਾਲੇ ਫੇ ਇਸੇ ਲੈ ਕੇ ਆਪਣੇ ਇਲਾਕੇ ਨਲਕੀ ਦੇਖਦੇ ਦੀ ਜੀ ਆਨ ਕੋ ਲੱਗਦਾ ਉਸੇ ਪ੍ਰਕਾਰ ਕੀ ਕਰਦੇ ਕੋਲ ਆਜ ਕਰਕੇ ਸਾਰੇ ਬੰਦੇ ਜਦੋਂ ਮਪਰੀ ਕਰਦਾ ਮੈਂ ਛੋੜੇ ਛੋੜੇ ਸਾਰੇ ਮੁਕ ਜਾਦੇ ਜਦ ਹਾਂ ਜਦੋਂ ਸੁਖਰਾ ਲੰਦੇ ਪਾਦਰਬੂਦੂ ਦਾ ਇਹ ਕਰਨਾ ਸੀ ਬਾਦੋਂ ਤੱਕ ਪਹਿਲਾਂ ਨਹੀਂ ਸੀ ਸੁਭੀ ਗਿਆ ਸੀ ਤਾਂ ਆਂਦਰ ਸੀਛ ਹੈ ਨਾ ਬਾਦੋਂ ਨਹੀਂ ਕੋਲ ਆਦੀ ਦੇ ਕਰੋ ਦੋਈ ਹੈ ਹਾਂ ਕਬੱਡੀ ਆ ਤੋਰ ਹਾਂ ਦੋ ਤੇ ਹਾਂਜੀ ਤੇ ਸਪਰਭੂ ਕੋ ਸਾਹ ਸਾਹ ਜਿਵੇਂ ਉਹ ਕੋ ਜਾਨ ਆ ਪਿਆ ਬੱਚੇ ਕਿਤਾਬ ਵੀ ਇਹ ਕਿਤਾਬ ਹੈ ਸਰ ਕੇ ਬਦਰੇ ਨੂੰ ਆ ਮੈਂ ਉਹਦੇ ਵਿੱਚ ਧਿਆਨ ਹੋਂਦ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜੇ ਪ੍ਰਸਾਦ ਤੇਰਾ ਸੁੱਤ ਰੂਪ ਸੁੱਤ ਰੂਪ ਤੇਰਾ ਬਾਲਾ ਦੀ ਅਕਾਲ ਜੇ ਤੂੰ ਬੁੱਧੂ ਆਣਾ ਬਧੀਆ ਬੁੱਧੀ ਤੇਰਾ ਕੋਲ ਪਰੂਪਾ ਉਸਕੇ ਸੇ ਗੁਰੂ ਜੀ ਦਾ ਬਣਿਆ ਆਵਾਜ਼ ਬਣਾ ਉਹਨਾਂ ਨਾਲ ਗੱਲਾਂ ਆਇ ਕਾਲੋ ਸ੍ਰੀ ਗੱਤੂ ਵੀ ਉਸ ਵੇਲੇ ਸਾਰੇ ਉਹਨਾਂ ਵਾਲ ਵੀ ਹੈ ਉਹ ਵੀ ਕਰਦੇ ਨੇ ਪੈਰਲ ਪ੍ਰਚਾਰ ਛੜਿਆ ਨਹੀਂ ਉਹਨੇ ਪ੍ਰਚਾਰ ਉਹ ਕਿਦੋਂ ਸਾਉ ਤੋਂ ਵੀ ਹੋ ਰਿਹਾ ਇਥੇ ਸ਼ਾਇਦ ਉਹ ਨੂੰ ਜਾਂ ਨੂੰ ਸਭ ਲਿਖੀ ਕੇ ਜਾਓ ਉਹ ਸਹੀ ਹੈਗਾ ਬੰਦਿਆਂ ਦਾ ਕਰਕੇ ਉੱਪਰ ਸਰ ਹੋਣਾ ਚਾਹੀਦਾ ਸਰ ਗੁਰਦੁਆਰਾ ਦੀ ਸਮਾਦਾਨ ਤੋਂ ਬਾਅਦ ਕਬਜਾ ਹੋਇਆ ਉੱਥੇ ہاں ਬਾਅਦ ਭਾਈ ਬਣੀ ਦੇ ਉਹ ਡੇਟ ਉੱਥੇ ਹੋਰ ਕੋਈ ਪਤਾ ਅੱਜ ਵੀ ਡੇਟ ਛੱਡਿਆ ਮਰਦਾਰ ਦੀ ਉਹ ਕਿਹੜੇ ਸਾਲ ਛੱਡਿਆ ਕਾਰਡ ਦਿੱਤਾ ਸੰਵਾਦਨਾ ਹੋਈ ਹੈ 16000 ਨਾਲ ਨਾ ਨਾ ਜੀ ਨਹੀਂ ਨਾ 16000 ਚਾਰਜ ਤਾਂ ਵੀ ਬਿਲ ਵੀ ਸੰਭਲਦਾ ਸਾਫ ਤੋਂ 16000 ਚ 77 ਹਜ਼ਾਰ ਤੱਕ 16000 255 ਦਾ ਕੋਈ ਪੰਜ ਪਾਸ਼ਾ ਤੇਰਾ ਕਿ ਬੀਚੀ ਹੋਣਾ ਹਰ ਵਾਰ ਦੁਆ ਹੈ ਦੋ ਵਿੱਚੋਂ ਅੱਛਾ ਵੇਕਣ ਨਹੀਂ ਹਾਂ ਵੇਕਣ ਨਹੀਂ ਕਦਾਂ ਨਾਲ ਕਰਦੋ ਨਾ ਕੋਈ ਨਹੀਂ ਪੁੰਦੇ ਨਾ ਦੇਖੋ ਆਪਾਂ ਨੂੰ ਚਾਰ ਕੇ ਬਣਦੇ ਸੀ ਚਾਰ ਤਾਂ ਬਣੀ ਹੋਈ ਐ 2 ਥੋੜਾ ਜਿਹਾ ਰਹੇ ਨੇ ਮਾਣਾ ਹਾਲਡਰ ਦੋ ਸਾਲ ਬਾਹਰ ਤੇ ਚਲ ਕਰੇ ਨੇ ਦੋ ਸਾਲ ਰਹੇ ਦੋਟੇ ਹੀ ਸਾਲ ਤੋਂ ਬਾਅਦ ਇਹਦੇ ਘੇਗਾ ਨਾਉ ਅੱਛਾ ਜੇ ਪ੍ਰਤਾਪ ਤੇਰਾ ਸੁੰਦਰ ਰੂਪ ਸੁਪਰਾਭ ਸਿਰ ਰੂਪ ਸਦਾ ਅਨੂਪ ਹਾਂ ਜੇ ਪ੍ਰਤਾਪ ਤੇਰਾ ਸੁੰਦਰ ਰੂਪ ਤੇ ਰੂਪ ਹੈ ਤੇਰਾ ਮੁਕੀ ਤੇਰਾ ਕੋ ਫੇਹੀ ਹੈ ਉਸ ਪ੍ਰਭੂ ਆਹ ਸਪਰੋ ਸਦਾ ਅਨ ਸਦਾ ਜੋ ਅਨੂਪ ਹੈ ਸਦਾ ਅਨੂਪ ਸਦਾ ਤੋਂ ਅਨੂਪ ਕਰਕੇ ਬੱਧ ਸੋ ਸਦਾ ਹਾਂ ਸਦਾ ਅਨੂਪ ਹੋਲੋ ਉਹਦਾ ਦਾ ਜੋ ਰੂਪ ਹੈ ਨਹੀਂ ਯਾਰ ਉਸਮੇ ਰੂਪ ਉਹਦਾ ਰੂਪ ਹੈ ਉਹ ਉਹ ਅਰੇ ਪਰੇ ਰੂਪਾਂ ਜਿਵੇਂ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸੇਮੁਰਾ ਸਦਾਬਿਨ ਰਾਜ ਜਿਵੇਂ ਪ੍ਰਸਾਦ ਤੇ ਨੀਕੀ ਜਾਤ ਸੋਹਣੀ ਜਾਤ ਹੈ ਜੀ ਜਿਆਦਾ ਆ ਸ਼ਰੀਰ ਦੀ ਜਿਨਾ ਪੜਨਾ ਬ੍ਰਾਹਮਣ ਸੀ ਥੋੜੀ ਜਾਤ ਹੈ ਛਤਰੀਆਂ ਦੀ ਵਧੀਆ ਜਾਤ ਹੈ ਉਹਨਾ ਉਹਨਾਂ ਦੇ ਉਤਪੰਨ ਦਾ ਜਾਤ ਹੁੰਦੀ ਤਾਂ ਜੀਆਤੀ ਮਨਦਾ ਕਰਦੇ ਕਿੰਨੀ ਜਾਤ ਹੈ ਬਰਾਮਣ ਜੀ ਨੂੰ ਵੀ ਲੈ ਲਈਏ ਦਾਮ ਜੀ ਬ੍ਰਾਹਮਣ ਛਤਰੀ ਨੇ ਦੋਏ ਸੀ ਜਿਹੜੇ ਆਪਣੇ ਘਰ ਦੇ ਨੇ ਛਤਰੀ ਨੇ ਇਹੋ ਜੀ ਉਹ ਵੀ ਜੀਰ ਰੋਟੀ ਉਹਨੇ ਰੋੜੇ ਹੂੰ ਉਹ ਦੋਏ ਰੋਟੀ ਦਾ ਹੈ ਹਾਂ ਰੋਟੀ ਤਾਂ ਪਹਿਲਾਂ ਹੈ ਜੀ ਰੋਟੀ ਤਾਂ ਆਪਈ ਹੈ ਬਈ ਰਾਜਾ ਅਜਾਉਂਦੇ ਬਾਈ ਰੋਟੀ ਪਿਛੇ ਦਾ ਬੈਂਟੀ ਉਹਨਾਂ ਹੈ ਬੈਂਟੀ ਕਾ ਪਿਆ ਨੇ ਯਾ ਬ੍ਰਾਹਮਣ ਸੀ ਬ੍ਰਾਹਮਣ ਤਾਂ ਕੋਈ ਹੈ ਨਹੀਂ ਪਹਿਲਾਂ ਲਾਪਣ ਬਸ ਬ੍ਰਾਹਮਣੋਂ ਪੁਰੂ ਬਣੇ ਹੋਏ ਸੀ ਜਗਤ ਦੇ ਉਹ ਮਤਲਬ ਆ ਕਿ ਇਹ ਕਹਦਾ ਕਿ ਕਿੰਨੀਆਂ ਪਛਾਤ ਲੱਗਦੀਆਂ ਬਿਸ਼ਰੂਆ ਛਤਰੀਆ ਨਾ ਛਤਰਾ ਛਤਰੀਆ ਯਾ ਬ੍ਰਾਹਮਣ ਪੁਜਾਰੀ ਬਾਲ ਲੱਗਿਆ ਉਹ ਬਾਬਾ ਸਰਾਮ ਨੇ ਕਹਾਰਾ ਕਿ ਉਹ ਛਤਰੀ ਉਹ ਬ੍ਰਾਹਮਣ ਬ੍ਰਾਹਮਣ ਹਾਂ ਜੀ ਜੀ ਤੁਹਾਨੂੰ ਫੜਨ ਕੀਤੀ ਹੈ ਬੋਲੀ ਮਾਂ ਜਤਰਾਣੀ ਆ ਪਥਰਾਉਂ ਦੇ ਪਾਤਰਾਮ ਵੀ ਪਾਤਰਾਮ ਹਾਂ ਬਾਪ ਜਦ ਬਿਦੇ ਉਹ ਬਾਪ ਨਾਲ ਕੋ ਚਲਦੀ ਉਹਦੇ ਵੀ ਕੰਮ ਦੀ ਹੈਗੀ ਹੈ ਮਾਰੀ ਹੋਈ ਰਹਿੰਦੇ ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਲ ਜਸ ਕਰੇ ਜੇ ਪ੍ਰਭਾ ਤੇਰੀ ਪਾਤਰ ਹੈ ਤੇ ਕਿਰਪਾ ਮੈਂ ਤੇਰੀ ਜਿਸ ਤਰ੍ਹਾਂ ਨੇ ਹੈ ਭਜਦੀ ਹੈ ਗੁਰ ਪ੍ਰਸਾਦ ਨੂੰ ਜਸ ਕਰੇ ਆਪਣਾ ਗਿਆਨ ਦੀ ਛਿੱਤੀ ਹੋਵੇ ਆਪਣਾ ਗਿਆਨ ਦੀ ਕਿਰਪਾ ਨੂੰ ਉਹਦਾ ਜਸ ਕਰੇ ਪੜੇ ਜਿਲਾ ਤੇ ਅਦ੍ਰਾਸ਼ ਅਦ੍ਰਾਸ਼ਾਂ ਦੀ ਨਹੀਂ ਸ਼ਕਤੀ ਹੈ ਉਹਦੇ ਨਾਲ ਇਮਾਨਦਾਰੀ ਨਾਲ ਹੈ ਇਮਾਨਦਾਰੀ ਨੇ ਵੀ ਲੱਭ ਸ਼ਕਤੀ ਹੈ ਜਿਹੜਾ ਇਮਾਨਾ ਇਹ ਹੀ ਚੀਜ਼ ਹੈ ਇਮਾਨਦਾਰੀ ਤੋਂ ਵੱਡੀ ਕੋਈ ਸ਼ਕਤੀ ਹੈ ਇਮਾਨਦਾਰੀ ਨਾਲ ਹੋ ਜਾਉਂਦਾ ਤੇ ਮਾਦਾਰੀ ਨਾਲ ਹੋ ਬੇਈਮਾਨੀ ਹੋ ਗਈ ਜੀ ਇਮਾਨਦਾਰੀ ਦੀ ਸ਼ਕਤੀ ਆਪਣੇ ਬਿਲਕੁਲ ਸਾਚੇ ਉਹਨਾਂ ਦੀ ਸਾਚੇ ਉਹ ਹੀ ਉਹ ਸਾਚਾ ਰਾਮਾਨ ਦਾ ਇੱਕੋ ਗੱਲ ਹੈ ਸਾਚਾ ਨੇ ਮਾਨ ਲੈਿਆ ਤਾਂ ਉਹਨਾਂ ਨੇ ਮਾਨ ਦੀ ਸ਼ਕਤੀ ਲੈ ਲਈ ਅਸੀਂ ਸਾਚੀ ਸ਼ਕਤੀ ਲੈ ਲਈ ਕੋਕਾ ਕੋਕਾ